ਗੁਰਸਿੱਖ ਦੀ ਮਰਜ਼ਾਦਾ ਕੀ ਹੈ ਗੁਰਸਿੱਖ ਕਿਸ ਤਰ੍ਹਾਂ ਦਾ ਹੁੰਦਾ ਹੈ ਹਰ ਵਕਤ ਹੁਕਮ ਦੀ ਉਡੀਕ ਵਿੱਚ ਰਹਿੰਦਾ ਹੈ ਤੇ ਜੋ ਵੀ ਹੁਕਮ ਹੋਏ ਉਹਦੇ ਵਿੱਚ ਰਾਜੀ ਰਹਿੰਦਾ ਗੁਰਮਖੋ ਹਮੈ ਪਰ ਹਰੈ ਮਨ ਭਾਵੈ ਖਸਮੈ ਕਾ ਪਾਣਾ ਪੈਰੀ ਪੈ ਪਾ ਖਾਕ ਹੋਏ ਦਰਗਾ ਪਾਵੇ ਮਾਨ ਨਿਮਾਰਾ ਵਰਤਮਾਨ ਵਿੱਚ ਵਰਤਦਾ ਹੋਮਨ ਹਾਰ ਸੋਈ ਪਰਵਾਨਾ ਤੇ ਰਾਜੀ ਹੋਏ ਰਜਾ ਵਿੱਚ ਦੁਨੀਆ ਅੰਦਰ ਜਿਉ ਮਹਿਮਾਨਾ ਐਸੀ ਬਿਰਤੀ ਹੈ ਗੁਰਸਿੱਖ ਦੀ ਮੈਂ ਅਰਜ ਕਰ ਲਿਆ ਸਾਰੇ ਉਹਨਾਂ ਦੀ ਹੈ ਨੇ ਮੌਤ ਨੂੰ ਪ੍ਰਵਾਨ ਕਰ ਲਿਆ ਗੁਰੂ ਅਰਜਨ ਦੇਵ ਸੁਝਾਓ ਦੇ ਰਹੇ ਨੇ ਕਿ ਜੇ ਤੂੰ ਇਸ ਤਰ੍ਹਾਂ ਕਰ ਇਸ ਮੌਤ ਨੂੰ ਮਰਨੇ ਨੂੰ ਪ੍ਰਵਾਨ ਕਰ ਲੈ ਇਹਦਾ ਡਰ ਮੁੱਕ ਜਾਏਗਾ ਪਹਿਲਾ ਬਰਨ ਕਬੂਲ ਤੇ ਜੀਵਨ ਕੀ ਛੱਡ ਆਸ ਹੋ ਹੋ ਸਭਨਾ ਕੀ ਰੇਣ ਕਾ ਆਓ ਹਮਾਰਾ ਪਾਸ ਓ ਸੱਜਣਾ ਗੁਰਮਖਾ ਜੇ ਤੂੰ ਕਿਤੇ ਗੁਰੂ ਦਰਬਾਰ ਵਿੱਚ ਆਉਣਾ ਜੇ ਗੁਰੂ ਚਰਨਾ ਵਿੱਚ ਆਉਣਾ ਤੇ ਫਿਰ ਪਹਿਲਾ ਐਸਾ ਬਣ ਕੇ ਆਵੀ ਜੇ ਇਹ ਪ੍ਰਮਾਨ ਤੇ ਤਾ ਆਵੀ ਇਹਦੇ ਨਾਲ ਤੈਨੂੰ ਬਹੁਤ ਲਾਭ ਹੋਵੇਗਾ ਤੈਨੂੰ ਮੌਤ ਮੌਤ ਦੇ ਤਰੀਕੇ ਨਾਲ ਨਹੀਂ ਆਵੇਗੀ ਫਿਰ ਸਹੀਲਾ ਬਰਨਾ ਹੋਵੇਗਾ ਮੈਂ ਅਰਜ ਕਰ ਰਿਹਾ ਸਾ ਕਬੀਰ ਦੇ ਸ਼ਬਦ ਤੋਂ ਕਿੰਨੇ ਇਸ ਰਾਮ ਨੂੰ ਜਾਣਕਾਰੀ ਬਹੁਤ ਜ਼ਰੂਰੀ ਹੈ ਰਾਮ ਦੀ ਜਾਣਕਾਰੀ ਕਰੋ ਰਾਮ ਕੀ ਹੈ ਜਿਨ੍ਹਾਂ ਨੇ ਜਾਣ ਲਿਆ ਉਹ ਮਰਦੇ ਨਹੀਂ ਸੰਸਾਰ ਚੋਂ ਕਬੀਰ ਕਹਿੰਦੇ ਨੇ ਕਿਸ ਨੇ ਪੁੱਛਿਆ ਭਾਈ ਤੂੰ ਤੂੰ ਕਿੰਨੀ ਕੁ ਜਾਣਕਾਰੀ ਕੀਤੀ ਹੈ ਆਪਣੀ ਜਾਣ ਕਰ ਤੂੰ ਕਿੱਥੇ ਇਕ ਤੱਕ ਪਹੁੰਚਿਆ ਕਬੀਰ ਕਹਿੰਦੇ ਨੇ ਜਿਸ ਰਾਮ ਦੀ ਕਥਾ ਅੱਜ ਤੱਕ ਨਹੀਂ ਮੁੱਕੀ ਜਿਸ ਰਾਮ ਦੀ ਕਥਾ ਜੁਗੋਂ ਤੋਂ ਲੈ ਕੇ ਅੱਜ ਤੱਕ ਸਮਾਪਤ ਨਹੀਂ ਹੋਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਨੇ ਰਾਮ ਕਥਾ ਜੁਗ ਜੁਗ ਅਟਲ ਸਭ ਕੋ ਨੇਤ ਸਾਰੇ ਲੋਕ ਬੇਅੰਤ ਬੇਅੰਤੀ ਕਹਿੰਦੇ ਨੇ ਭਈ ਪਰੇ ਤੋਂ ਪਰੇ ਕਥਾ ਹੈ ਗੁਰੂ ਨਾਨਕ ਦੇਵ ਜੀ ਦਾ ਇੱਕ ਪਾਠ ਹੈ ਗੁਰਬਾਣੀ ਵਿੱਚ ਜਪਜੀ ਸਾਹਿਬ ਕਿੰਦੇ ਪਰੇ ਤੋਂ ਪਰੇ ਅਜ ਤੱਕ ਕਰੋੜਾਂ ਕਥਾਕਾਰ ਹੋ ਚੁੱਕੇ ਨੇ ਤੇ ਉਹਨਾਂ ਨੇ ਕਰੋੜਾਂ ਕਥਾਕਾਰਾਂ ਨੇ ਕਰੋੜਾਂ ਹੀ ਕਥਾ ਤੇ ਕਰੋੜਾਂ ਵਾਰ ਕਥਨ ਕੀਤੀਆਂ ਨੇ ਕਥਾ ਅਜੇ ਤੱਕ ਨਹੀਂ ਮੁੱਕੀ ਕਥਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਤਿੰਨ ਵਾਰ ਯੂ ਆਇਆ ਕਿੰਨੇ ਕਰੋੜਾਂ ਕਥਾਕਾਰਾਂ ਨੇ ਕਰੋਨਾ ਹੀ ਕਥਾ ਕਰੋਨਾ ਵਾਰ ਕਥਨ ਕੀਤੀਆਂ ਅਜੇ ਤੱਕ ਅਣੀ ਮੁੱਕੀ ਕਥਾ ਇਹ ਮੁੱਕੀ ਕਿਉਂ ਲਈ ਇਸ ਵਾਸਤੇ ਕਿ ਸਭ ਕਥਾਕਾਰਾਂ ਦਾ ਵਿਚਾਰ ਇੱਕ ਨਹੀਂ ਬਣਿਆ ਇਹਨਾਂ ਦੀ ਦਲੀਲ ਇੱਕ ਨਹੀਂ ਹੋਈ ਇਹਨਾਂ ਦੀ ਜੋ ਕੁਛ ਵੀ ਉਚਾਰਨ ਕੀਤਾ ਆਪਣੀ ਆਪਣੀ ਬੁੱਧੀ ਅਨੁਸਾਰ ਕੀਤਾ ਆਪਾ ਆਪ ਆਪਣੀ ਬੁੱਧ ਹੈ 체ਤੀ ਬਰਨਤ ਪਿੰਨ ਪਿੰਨ ਤੋਹ ਤੇਤੀ ਇਸ ਵਾਸਤੇ ਵਿਚਾਰ ਇੱਕ ਨਾ ਹੋਣ ਕਰਕੇ ਅਜ ਤੱਕ ਕਥਾ ਹੀ ਨਹੀਂ ਮੁੱਕੀ ਕਬੀਰ ਕਹਿੰਦਾ ਮੈਂ ਜਾਣ ਲਈ ਮੈਂ ਇਸ ਕਥਾ ਨੂੰ ਜਾਣ ਲਿਆ ਰਾਮ ਦੀ ਕਥਾ ਨੂੰ ਜਿਹੜੀ ਅਜ ਤੱਕ ਮੁੱਕੀ ਨਹੀਂ ਕਿਸ ਤਰ੍ਹਾਂ ਜਾ ਰਹੇ ਕਬੀਰ ਕਹਿੰਦੇ ਇਹ ਚੀਜ਼ ਜੰਮੀ ਜਾਂਦੀ ਹੈ ਤੂੰ ਇਹ ਜਾਣਕਾਰੀ ਸਾਨੂੰ ਵੀ ਦੱਸ ਤੂੰ ਕਿਸ ਤਰ੍ਹਾਂ ਜਾਣ ਲਈ ਹੈ ਕਬੀਰ ਕਹਿੰਦੇ ਜਾਨੀ ਜਾਨੀ ਦਾ ਰਾਜਾ ਰਾਮ ਕੀ ਕਹਾਣੀਆਂ ਪਿਆਰੇ ਇੱਥੇ ਇੱਕ ਵਾਰੀ ਸ਼ਬਦ ਹੈ ਪਿਆਰੇ ਉਹ ਮਿੱਤਰਾਂ ਇੱਕ ਵਾਰੀ ਹੈ ਜਾਣ ਜਾਣਕਾਰੀ ਉਹ ਪਿਆਰੇ ਮਿੱਤਰ ਮੈਂ ਜਾਣ ਲਈ ਆ ਕਹਾਣੀ ਜਿਹੜੀ ਬਹੁਤ ਲੰਬੀ ਸੀ ਰਾਮ ਦੀ ਇਹ ਮੇਰੀ ਸਮਝ ਵਿੱਚ ਆ ਗਈ ਹੈ ਕੀ ਸਮਝ ਵਿੱਚ ਆਇਆ ਕਹਿੰਦਾ ਅੰਤਰ ਜੋਤ ਰਾਮ ਪਰਗਾਸਾ ਆ ਜਿਹੜੀ ਸਾਡੇ ਅੰਦਰ ਜੋਤ ਹੈ ਦਾ ਕਹਿੰਦਾ ਇਹ ਜੋਤ ਉਸੇ ਰਾਮ ਦਾ ਹੀ ਪ੍ਰਕਾਸ਼ ਹੈ ਸਭ મે ਜੋਤ ਜੋਤ ਹੈ ਸੋਏ ਤਿਸ ਦੇ ਚੰਨ ਸਭ ਮੇ ਚੰਨ ਹੋਏ ਇਹ ਪ੍ਰਕਾਸ਼ ਹੋਦਾ ਜੋਤ ਦਾ ਹਬ ਸਮਾੜੀ ਜੋਤ ਜੋ ਚਲ ਘਟਾਉ ਚੰਦਰਮਾ ਕਿਸ ਨੇ ਪੁੱਛਿਆ ਜੀ ਇਹ ਸਾਰਿਆਂ ਵਿੱਚ ਕਿਵੇਂ ਹੋ ਸਕਦੀ ਹੈ ਇੱਕ ਜੋਤ ਸਾਰਿਆਂ ਵਿੱਚ ਕਿਵੇਂ ਆ ਗਈ ਕेंद्रीय ਜਿਸ ਤਰ੍ਹਾਂ ਜਲ ਘਟਾਉ ਚੰਦਰਮਾ ਜਿਸ ਤਰ੍ਹਾਂ 100 ਘੜੇ ਵਿੱਚ ਪਾਣੀ ਪਾ ਦਿਓ ਤੇ ਉਹਦੇ ਵਿੱਚ ਇੱਕੋ ਹੀ ਚੰਦਰਮਾ ਦਿਸਦਾ ਹੈ ਚੰਦਰਮਾ ਤੇ ਇੱਕੋ ਹੀ ਹੈ ਪਰ 100 ਘੜੇ ਵਿੱਚ ਜੇ ਪਾਣੀ ਪਾਇਆ ਜਾ ਤੇ ਉਹਦਾ 100 ਸਰੂਪ ਹੋ ਜਾਂਦਾ ਇਸੇ ਤਰ੍ਹਾਂ ਹੀ ਸਭ ਸਮਾਨੀ ਜੋਤ ਜੋ ਜਲ ਘਟਾਉ ਚੰਦਰਮਾ ਸੋ ਇਸ ਵਾਸਤੇ ਕਹਿੰਦਾ ਉਹ ਜੋਤ ਦਾ ਹੀ ਪ੍ਰਕਾਸ਼ ਹੈ ਸਾਰੇ ਜੋ ਸਾਡੇ ਅੰਦਰ ਇਹੋ ਹੀ ਰਾਮ ਹੈ ਅੰਤਰਜੋਤ ਰਾਮ ਪ੍ਰਗਾਸਾ ਤੇ ਗੁਰਮਖ ਵਿਰਲੇ ਜਾਨੀ ਰਾਜਾ ਰਾਮ ਕੀ ਕਹਾਣੀ ਓ ਗੁਰਮਖ ਵਿਰਲੇ ਜਾਨੀ ਰਾਜਾ ਰਾਮ ਕੀ ਕਹਾਣੀ ਓ ਗੁਰਮਖ ਵਿਰਲੇ ਜਾਨੀ ਰਾਜਾ ਰਾਮ ਕੀ ਕਹਾਣੀ ਗੁਰਮਖ ਵਿਰਲੇ ਜਾਨੀ جان ਲਈਏ کندا تینوں ہن جانکاری ہو گئی ہے میں تاں نہیں مرنا مرن دا کارن اے ہے کہ جانکاری بہت ضروری ہے دھیان رکھنا سਤグル ਨੂੰ من لے ہن کچھ ہے تے جانکاری کرنی ہور کچھ ہے ঈশ্বর نو من لے ہا ہور ہے تے جانکاری ہور ہے جنہاں نے جانکاری کر لی ہے او مر دے نہیں کیونکہ ہردے ਜਿਨ ਕੈ ਰਾਮ ਵਸਿਆ ਮਨ ਮਾਇ ਨਹੀਂ ਮਰੇ ਅੱਜ ਤੱਕ ਅਰਜਿੰਦਾ ਦੇ ਦਿਨੇ ਰਾਤ ਕਬੀਰ ਕਬੀਰ ਹੁੰਦੀ ਪਈ ਹੈ ਮੈਂ ਅਰਜ ਕਰ ਰਿਹਾ ਸਾ ਗੁਰਸਿੱਖ ਦਾ ਜੀਵਨ ਇਸ ਤਰ੍ਹਾਂ ਦਾ ਹੈ ਜਿਨ੍ਹਾਂ ਨੇ ਐਸਾ ਕੀਤਾ ਗੁਰੂ ਕਾ ਬਚਨ ਮੰਨ ਕੇ ਗੁਰੂ ਤੋਂ ਸਿੱਖਿਆ ਲਈ ਉਪਦੇਸ਼ ਲਿਆ ਤੇ ਨਾਮ ਵਿੱਚ ਨਾਮ ਜਪ ਕੇ ਆਪਣਾ ਜੀਵਨ ਉੱਚਾ ਕੀਤਾ ਜੋ ਹਰ ਗੁਣ ਗਾ ਕੇ ਰਸਤੇ ਤੇ ਕਈ ਦੇ ਨ ਸੰਸਾਰ ਵਿੱਚ ਨਿਸ਼ਾਨਾ ਤੇ ਇੱਕੋ ਹੀ ਹੈ ਪਰ ਰਸਤੇ ਕਈ ਨੇ ਦੁਨੀਆ ਵਿੱਚ ਈਸ਼ਵਰ ਤੱਕ ਪਹੁੰਚਣ ਦੇ ਬਹੁਤ ਰਸਤੇ ਸੰਸਾਰ ਵਿੱਚ ਆਖਤਿਆਰ ਹੋਏ ਅੱਪ ਤੇ ਰਿਸ਼ਵਾ ਹੋਣਾ ਹੋਵੇ ਸਮੇਲੇ ਤੇ ਤੇ ਨਿਸ਼ਾਨਾ ਤੇ ਇੱਕੋ ਹੀ ਹੁੰਦਾ ਹੈ ਤੇ ਪਰ ਇਹ ਮੇਲੇ ਜਾਣਾ ਭਾਵੇਂ ਲੱਖ ਬੰਦਾ ਉੜਾ ਹੋਵੇ ਤੇ ਭਾਵੇਂ 50000 ਭਾਵੇਂ ਕਿੰਨਾ ਵੀ ਆਵੇ ਉਹਨਾਂ ਨੂੰ ਸਾਰਿਆਂ ਨੂੰ ਪੁੱਛੋ ਕਿ ਕਿੱਥੇ ਚੱਲ ਜਾਂਦਾ ਮੇਲੇ ਜਾਣ ਦੂਜੇ ਨੂੰ ਪੁੱਛੋ ਕਹਿੰਦਾ ਮੇਲੇ ਜਾਣ ਪਰ ਧਿਆਨ ਰੱਖਿਓ ਇਹਨਾਂ ਦਾ ਨਿਸ਼ਾਨਾ ਤੇ ਕੋਈ ਹੈ ਉਹਨੇ ਤੇ ਪੈਣੀ ਸਾਹੀ ਹੈ ਪਰ ਰਸਤਾ ਇੱਕ ਕਦੇ ਵੀ ਨਹੀਂ ਹੋਇਆ ਵੱਖ-ਵੱਖ ਰਸਤੇ ਹੋਣਗੇ ਕੋਈ ਸਾਈਕਲ ਸਵਾਰ ਹੋ ਕੇ ਰਸਤੇ ਇੱਥੇ ਆ ਜਾਂਦਾ ਕੋਈ ਟਰੈਕਟਰ ਤੇ ਟਰਾਲੀਆਂ ਤੇ ਆ ਜਾਂਦੇ ਨੇ ਕੋਈ ਕਾਰ ਤੇ ਸਵਾਰ ਹੋ ਕੇ ਆ ਜਾਂਦਾ ਕੋਈ ਬੱਸਾਂ ਤੇ ਰੇਲ ਗੱਡੀ ਦੇ ਰਸਤੇ ਆ ਜਾਂਦਾ ਕੋਈ ਹਵਾਈ ਜਹਾਜ਼ ਤੇ ਵੀ ਆ ਸਕਦਾ ਮੈਂ ਅਰਜ ਕਰ ਰਿਹਾ ਸਾਰੇ ਰਸਤੇ ਅਨੇਕ ਨੇ ਪਰ ਨਿਸ਼ਾਨਾ ਸਭ ਦਾ ਇੱਕ ਹੈ ਇਸੇ ਤਰ੍ਹਾਂ ਹੀ ਧਰਮ ਅਨੇਕ ਨੇ ਦੁਨੀਆ ਵਿੱਚ ਪਰ ਉਹਨਾਂ ਦਾ ਨਿਸ਼ਾਨਾ ਤੇ ਇੱਕੋ ਈਸ਼ਵਰੀ ਹੈ ਨਾ ਉੱਥੇ ਜਾਣਾ ਮਰਨਾ ਸਭ ਦਾ ਨਿਸ਼ਾਨਾ ਹੈ ਪਰ ਇੱਥੇ ਵਿਚਾਰ ਇੱਕ ਨਹੀਂ ਮਿਲਿ ਕਬੀਰ ਆ ਜਾਂਦੇ ਨੇ ਮੈਂ ਮਰਦਾ ਹੀ ਨਹੀਂ ਕਿਉਂਕਿ ਜਮੀਰ ਕਰਕੇ ਨਹੀਂ ਨ ਮਰਿਆ ਜਿਹੜਾ ਜਮੀਰ ਕਰਕੇ ਨਹੀਂ ਮਰਦਾ ਉਹ ਸੰਸਾਰ ਤੋਂ ਨਹੀਂ ਮਰ ਸਕਦਾ ਉਹ ਫੇਰ ਤੁਹਾਡਾ ਉੱਥੇ ਹੀ ਆ ਜਾਂਦੇ ਗੁਰੂ ਚਰਨਾਂ ਵਿੱਚ ਹੀ ਆਉਣਗੇ ਮੈਂ ਅਰਜ ਕੀਤਾ ਸੀ ਕਬੀਰ ਕਹਿੰਦੇ ਨੇ ਅਬ ਕੈਸੇ ਬਰੋਂ ਮਰਨ ਮਨ ਮੰਨਿਆ ਤੇ ਮਰ ਮਰ ਜਾਤੇ ਜਿਨੀ ਰਾਮ ਨਾ ਜਾਣਿਆ ਅੱਗੇ ਕਹਿੰਦੇ ਨੇ ਮਰਨੋ ਮਰਨ ਕਹੈ ਸੁਭ ਕੋਈ ਸਾਰੇ ਹੀ ਪਤਾ ਕਿ ਮਰਨਾ ਹੈ ਪਰ ਸਹਜੇ ਮਰੇ ਅਬਰ ਹੋਏ ਸੋਈ ਸਹੀਲਾ ਮਰਨਾ ਸਹਿਜ ਨਾਲ ਮਰਨਾ ਗਿਆਨ ਅਵਸਥਾ ਵਿੱਚ ਹੋ ਕੇ ਮਰਨਾ ਜਿਹਨੂੰ ਗਿਆਨ ਹੋ ਗਿਆ ਕਿ ਇਹ ਮਰਨਾ ਨਹੀਂ ਇਹ ਤਾਂ ਜਨ ਸਹਿਜ ਸਹਿਜ ਤੋਂ ਭਾਵ ਹੁੰਦਾ ਗਿਆਨ ਸਹਿਜ ਜੇ ਤੋਂ ਭਾਵ ਹੈ ਜਿਹਨੂੰ ਇਹ ਗਿਆਨ ਹੋਇਆ ਜਿਹੜਾ ਮੈਂ ਪਿੱਛੇ ਆਖਿਆ ਜਿਹਨੂੰ ਜਾਣਕਾਰੀ ਹੋ ਗਈ ਹੈ ਕਿ ਇਹ ਮੌਤ ਨਹੀਂ ਇਹ ਮਰਨਾ ਨਹੀਂ ਇਹ ਸਾਰੀ ਤਬਦੀਲੀ ਹੈ ਇਹ ਸਾਰਾ ਪਰਿਵਰਤਨ ਹੈ ਇਹ ਸਭ ਲੀਨਤਾ ਹੋ ਰਹੀ ਹੈ ਇੱਕ ਪਾਸੇ ਆ ਰਿਹਾ ਇੱਕ ਪਾਸੇ ਜਾ ਰਿਹਾ ਲੀਨਤਾ ਕਿਸ ਤਰ੍ਹਾਂ ਹੋ ਰਹੀ ਹੈ ਕਿੰਦੇ ਲੈ ਸਤਰਾ ਹੋ ਰਹੀ ਹੈ ਜਿਵੇਂ ਇੱਕ ਆਗ ਤੇ ਕਨੂਕਾ ਕੋਠ ਆਗ ਉੱਠੇ ਨਿਆਰੇ-ਨਿਆਰੇ ਹੋਏ ਕੇ ਫਿਰ ਆਗ ਮੇਂ ਮਿਲenge ਜਿਸ ਤਰ੍ਹਾਂ ਅੱਗ ਦੇ ਚੰਗਿਆਰੇ ਅੱਗ ਤੋਂ ਵੱਖ ਹੋ ਜਾਂਦੇ ਨੇ ਪਰ ਅੱਗ ਤੋਂ ਵੱਖ ਹੋ ਕੇ ਵੀ ਫਿਰ ਉਹ ਫੇਰ ਅੱਗ ਵਿੱਚ ਆ ਜਾਂਦੇ ਨੇ